ਸ਼ਲੋਕ ਮਹਲਾ ਤੀਜਾ ਗੁਰਮੁਖ ਸੰਸਾ ਮੂਲ ਨ ਹੋਵਈ ਚਿੰਤਾ ਵਿੱਚੋਂ ਜਾਏ ਜੋ ਹੋਏ ਸੋ ਸਹਜੇ ਹੋਏ ਕਹਿਣਾ ਕਿਛੂ ਨ ਜਾਏ ਗੁਰਮੁਖ ਸੰਸਾ ਮੂਲ ਹੋਵੇ ਗੁਰਮੁਖਾਂ ਨੂੰ ਗੁਰਮੁਖਾਂ ਨੂੰ ਸੰਸਾ ਹੁੰਦਾ ਹੀ ਜੋ ਗੁੱਧ ਗਰਮ ਕਰਦੇ ਨੇ ਉਹ ਕੋਈ ਬਿਚ ਕਰਦੇ ਨੇ ਪਾਣੇ 'ਚ ਕਰਦੇ ਨੇ ਸ਼ੰਕਾਰ ਖੰਡਾ ਤਾਂ ਉਹਨਾਂ ਨੂੰ ਹੁੰਦਾ ਹੀ ਨਹੀਂ ਹਾਂਜੀ ਚਿੰਤਾ ਵਿੱਚੋਂ ਜਾਏ ਚਿੰਤਾ ਪੈ ਜਿੰਦੀ ਜਾਂਦੀ ਹੈ ਜਦ ਕਰਦੇ ਉਹ ਪਾਣੇ ਦੇ ਮੋੜੇ ਤੇ ਰੱਖ ਕੇ ਚਲਾਉਂਦੇ ਨੇ ਸਾੜੀ ਉਹ ਹੁਣੇ ਹੀ ਜਿਉ ਤਰ੍ਹਾਂ ਇਹ ਜੋ ਖਰਾਬ ਹੋਣਾ ਸੀ ਹੋ ਗਿਆ ਉਹਨਾਂ ਦੇ ਤਾਂ ਬਸ ਦੀ ਗੱਲ ਹੈ ਨਹੀਂ ਹਾਂਜੀ ਜੋ ਕਿਛੋ ਹੋਇਸ ਸਹਜੇ ਹੋਏ ਕਹਿਣਾ ਕਿਛੂ ਨਾ ਜਾਏ ਕਰਿਓ ਤਾਂ ਕੁਦਰਤੀ ਹੋ ਜਾਂਦਾ ਜੋ ਹੁੰਦਾ ਕਹਿਣਾ ਕਿਛੂ ਕਹਿ ਸਕਦੇ ਪਰਮੇਸ਼ਰ ਕਰਦਾ ਹੋ ਜਾਂਦਾ ਹਾਂਜੀ ਨਾਨਕ ਤਿੰਨ ਆਖਿਆ ਆਪ ਸੁਣੇ ਜੇ ਲਾਇਨ ਪੰਨੇ ਪਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਨਾਨਕ ਉਹਨਾਂ ਲਾ ਕੇ ਆਪ ਸੁਣਦਾ ਜਿਹੜੇ ਉਹਨੇ ਆਪਣੇ ਪੰਨੇ ਪਾਏ ਨੇ ਜਿਹੜੇ ਉਹਨੇ ਆਪਣੇ ਲੜ ਲਾਏ ਨੇ ਲੜ ਲਾ ਲੈ ਜਿਹੜੇ ਦਾ ਆਖਿਆ ਆਪ ਹੁੰਦਾ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਜਿਹੜੇ ਉਹਦੇ ਵਿਆਹ ਤੇ ਗੱਲ ਕਰਦੇ ਨੇ ਨਾ ਵਿਆਹ ਤੇ ਪਰਮੇਸ਼ਰ ਦੇ ਵਿਆਹ ਤੇ ਗੋਲਦੇ ਨੇ ਉਹਨਾਂ ਦਾ ਆਖਿਆ ਤੁੰ ਸੁਣਦੇ ਕੋਈ ਗਲਤੀ ਨਾ ਬੋਲ ਹਾਂਜੀ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਉ अनदिन जागे कदे ना सोवे सहज अमृत पी आओ काल नुए मान मनसा मन ने समाणी मन मन ते बिचे समागी मनसा मान ली मन दी इच्छा ली मन दी ज इच्छा मरगी मन दे बिचे ही समागी ओठे समागी जथे मरी ਅੰਤਰ ਨਿਰਮਲ ਨਾਮ ਉੱਥੇ ਨਿਕਲਿਆ ਜੀ ਅੰਤਰ ਨਿਰਮਲ ਨਾਮ ਪੈਦਾ ਹੋਇਆ ਉੱਥੇ ਜਿੱਤੇ ਮਨਸਾ ਮਰ ਕੇ ਜਮਾਈ ਹੈ ਉੱਥੇ ਜਮਿਆ ਕੀ ਨਿਰਮਲ ਨਾਮ ਪੈਦਾ ਹੋਇਆ ਅੰਦਰ denn ਜਾਗੇ ਸਗੇ ਨ ਸੋਵਣ ਛਾਏ ਅੰਮ੍ਰਿਤ ਦਾ ਚਲਣਾ ਫੁੱਟ ਪਿਆ ਤੇ ਸੋਣਾ ਜੀ ਨੇ ਦੀ ਅੰਦਰ ਰਹਿੰਦੇ ਨੇ ਅੰਮ੍ਰਿਤ ਉੱਥੇ ਛੱਡਦੇ ਰਹਿੰਦੇ ਮੰਚਾਰੇ ਬੰਦ ਤੋਂ ਬਾਅਦ ਮੰਬੀ ਚਾਨਣ ਤੋਂ ਬਾਅਦ ਫਿਰ ਨਾਮ ਅਮਰਤ ਚਰਨਾ ਫਟਿਆ ਉੱਥੋਂ ਹੀ ਬਾਸ ਉਹਦੇ ਵਿੱਚੋਂ ਪਹਿਲਾਂ ਮੰਨ ਦੀਆਂ ਚੰਨ ਕਰਦੀਆਂ ਜਾਂ ਫਿਰ ਨਾਮ ਅਮਰਤ ਨਿਕਣ ਲੱਗੇ ਸਾਰੇ ਠੀਕ ਹੈ ਜੀ ਸਹਿਜ ਅਮਰਤ ਪੀ ਆਓ ਕੀ ਰਹਿਣੇ ਠੀਕ ਲੋੜ ਆ ਪੀ ਲੋ ਹਾਂ মিঠা બોલે અમૃત बानी, અનદન હર ગુણ ગાઓ નિજકર વાસા સદા સુહнде નાનક તિન મિલ્યા સુ પાઉં মিঠા બોલે અમૃત વાણી અનદન હર ગુણ ગાઓ તેસબી દસ્તા તી તેડા જે પીતીયે વાણી જે નામ પીછાડા બચાય ઓ નામ মিঠા બોલે ਆਨੰਦਨ ਹਰ ਗੋਣ ਗੋਣ ਵਾਲੀ ਅਵਸਥਾ ਬਣ ਗਈ ਹਾਂਜੀ ਨਿਜ ਘਰ ਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆ ਸੁਪਾਉ ਨਿਜ ਘਰ ਵਾਸਾ ਘਰੇ ਆਓ ਬੰਸਾ ਸੜੇ ਮਦੀ ਤੇ ਸੜੇ ਬੈਠੇ ਬਾਹਰ ਤੇ ਜਾਣ ਦੀ ਲੋੜ ਨਹੀਂ ਨਿਜ ਘਰ ਵਾਸਾ ਸਦਾ ਸੁਹੰਦੇ ਸੜੇ ਸੁਹਣੇ ਲੱਗਦੇ ਨੇ ਅੰਮ੍ਰਿਤ ਪੀਂਦੇ ਸਹਜੇ ਅੰਮ੍ਰਿਤ ਪਿਆਓ ਸਹਜੇ ਅੰਮ੍ਰਿਤ ਚਾਹੇ ਆਪੀਓ ਜਾਂ ਜਿਸਨੂੰ ਪਿਆਓ ਜੇ ਨਾਲ ਉਹ ਗ੍ਰਹਿਣ ਵੀ ਆਨੰਦ ਕਰ ਦੋ ਆਪ ਦੀ ਵੀ ਹੋ ਆਪ ਜਿਹਾ ਭਾਇ ਭਰਾ ਨਾਮ ਜਿਹਾ ਪਾਵਾਂ ਨਿਕਰ ਬਾਥਾ ਸਦਾ ਸੁਹੰਦੇ ਸਦਾ ਸੁਹੰਦੇ ਸਦਾ ਨੇ ਨਾਨਕ ਤਿੰਨ ਮਿਲਿਆ ਸੁਖ ਪਾਉ ਆ ਨਾਨਕ ਤਿੰਨ ਮਿਲਿਆ ਸੁਖ ਪਾਉ ਤੈਨਾਂ ਨੂੰ ਮਿਲਿਆ ਜੇ ਨਾਲ ਸੁਖੇ ਸੁਖ ਮਿਲਦੇ ਠੀਕ ਹੈ ਜੀ ਨਿਜ ਘਰ ਚ ਵਾਸਾ ਹੋ ਗਿਆ ਨੇ ਤਾਂ ਨਿਜ ਘਰ ਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆ ਸੁਪਾਉ ਅੰਦਰੋਂ ਅੰਬਰ 'ਚੋਂ ਫੋਟਿਆ ਆ ਠੀਕ ਹੈ ਜੀ ਪੌੜੀ ਹਰ ਧਨ ਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪਾਸੋਂ ਦੇ ਵਾਇਆ ਜੇ ਕਿਸੇ ਕਿਹੂੰ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਆਖੇ ਕੋਈ ਕਿਹੋ ਦਵਾਈ ਇਹ ਹਰ ਤਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਵਾਹਰ ਹੀਰਿਆਂ ਦਾ ਧਨ ਸਤਗੁਰ ਨੇ ਇਹ ਆਪਣੇ ਗੁਰਦੇਵ ਨੇ ਸਤਗੁਰ ਪਾਸੋਂ ਦਵਾਇਆ ਜੀ ਧਨ ਅੰਦਰੋਂ ਐ ਦੀਨੇ ਗੋਲ ਨੇ ਇਹ ਇਹ ਗੁਣਾ ਰੂਪੀ ਟਣ ਹੈ ਹਰ ਤਨ ਜੋਰ ਕਿਤੇ ਕਿਤੇ ਨਾਲ ਨਾ ਜਾਈ ਬਣਾਇਆ ਸ਼ਕਤੀ ਨਾਲ ਕਿਸੇ ਨਾਲ ਕੋਈ ਬਣਾ ਲਵੇ ਤਨ ਜੇ ਕਿਸੇ ਨੂੰ ਮੁੜ ਕੇ ਤੋਤਾ ਮੈਨੂੰ ਦੇ ਦੇ ਹੋ ਸਕਦਾ ਖੋਇਆ ਨਹੀਂ ਜਾ ਸਕਦਾ ਜੇ ਕਿਸੇ ਤਾਂ ਕੋਈ ਕੀ ਮੰਗ ਲਏ ਅੱਖਾਂ ਕੋਈ ਕਹਿ ਦੇ ਜੇ ਜਿਦੇ ਕੋ ਕਿਸੇ ਨੂੰ ਦਿਸ ਵੀ ਬਵੇ ਕੋਈ ਕਿਉ ਮੰਗ ਲਏ ਇਹ ਜੇ ਕੋ ਕੋਈ ਮੰਗਲਵੇ ਆ ਕਹੇ ਕੋਈ ਤੋਂ ਕੋਈ ਤੇ ਹੋ ਦਿਵਾਏ ਇਹ ਹਰ ਤਨ ਜੋੜੀਤੇ ਕਿਸੇ ਨਾਲ ਨਾ ਜਾਏ ਬੰਡਾਇਆ ਕੋਈ ਕਹੇ ਇਹਨੂੰ ਦੇ ਦੇ ਉਹ ਨਹੀਂ ਦਿੱਤਾ ਜਾ ਸਕਦਾ ਉਹ ਕਹੇ ਉਹ ਕਿੰਨਾ ਜਿੰਨਾ ਮਰਜੀ ਜੋਰ ਬਾਬਾ ਜਿੰਨਾ ਮਰਜੀ ਜੋਰ ਲਾਵੇ ਜਿੰਨੀ ਮਰਜੀ ਸ਼ਕਤੀ ਲਾਵੇ ਤੇ ਬੰਡਾਇਆ ਜਾ ਸਕਦਾ ਜਿਸਾ ਤੇ ਕਹਿਣੇ ਤੇ ਇਸ ਤੇ ਜੋਰ ਪਾਉਣੇ ਤੇ ਜਿਦੋਂ ਕੋਲ ਗਿਆਨ ਹੁੰਦਾ ਉਹ ਸੋਚਦਾ ਵਾਅ ਭਾਸਲ ਕਰਨਾ ਪੈਂਦਾ ਉਹਨੂੰ ਜੀ ਜੀ ਮਤਲਬ ਇਹਦਾ ਹੈ ਠੀਕ ਹੈ ਜੀ ਹਾਂ ਜੀ ਜਿਸ ਨੂੰ ਸਤਗੁਰ ਨਾਲ ਕੀ ਵੰਡ ਹੱਥ ਆਵੇ ਜਿਸ ਕਰਤਾ ਧੁਰ ਲਿਖ ਪਾਇਆ ਜਿਹਨੂੰ ਕਰਤੇ ਬੁਰਖ ਨੇ ਦੇਣਾ ਹੁੰਦਾ ਧਨ ਉਹ ਕਰਤਾ ਔਰਖੋ ਦੇ ਨਾਲ ਉਹਨੂੰ ਸਾਨੂੰ ਕਰ ਬੰਦਾ ਜੋੜ ਦਿੰਦਾ ਜਿਸ ਨੂੰ ਸਤਗੁਰ ਨਾਲ ਹਰ ਸਰਦਾ ਨਾਏ ਉਹਦੇ ਨਾਲ ਹਰ ਸਰਦਾ ਉਹਦੇ ਨਾਲ ਛਰਦਾ ਲੱਭ ਜਾਂਦੀ ਹੈ ਪ੍ਰੇਮ ਲੱਜਾਂਦਾ ਇਸ ਹਰ ਤਨ ਕੀ ਵੰਡ ਹੱਥ ਆਵੇ ਇਸ ਹਰ ਤਨ ਦੀ ਵੰਡ ਹੱਥ ਆਵੇ ਜਿਸ ਕਰਤੇ ਤੁਰ ਲਿਖ ਪਾਇਆ ਕਰਤਾ ਤੁਰ ਬਿਵਾਹ ਹੀ ਦਿੰਦਾ ਉਹ ਨੂੰ ਮਿਲਦੀ ਹੈ ਰੰਨਾ ਹਾਂ ਜਿਹਦੇ ਕੋਲ ਹੁੰਦਾ ਉਹਦੇ ਨਾਲ ਪ੍ਰੇਮ ਕਰੇ ਤੇ ਮਿਲਦੀ ਉਹਦੇ ਕੋਲ ਉਹ ਨਹੀਂ ਮਿਲਦੀ ਮਿਲਦੀ ਦਰਵਾਤ ਨਹੀਂ ਉਹ ਬੱਦੀ ਦੱਸ ਦਿੰਦਾ ਕੀ ਵੰਡ ਹੱਥ ਆਵੇ ਜੇ ਤਨੋ ਕਰਤੇ ਤੁਰ ਲਿਖ ਪਾਇਆ ਉਹਨੂੰ ਵੰਡ ਹੱਥ ਆ ਗਿਆ ਦੀ ਹੈ ਜੇ ਕਰਤਾ ਦਰਗਾਹ ਮਨਜ਼ੂਰੀ ਦੇ ਦੇਵੇ ਅਲ ਉਹਦੇ ਨਾਲ ਜੋੜ ਦੇਵੇ ਕੋ ਤਨ ਪਹਿਲਾਂ ਹੋਵੇ ਪਹਿਲਾਂ ਉਹਦੀ ਸੰਗਤ ਕਿੱਥੀ ਜੋੜ ਦੇਵੇ ਫਿਰ ਤੋ ਦਰਗਾਹ ਆਪ ਦੇ ਦਿੰਦਾ ਜੇ ਉਹ ਉਸ ਵਸਤਾ ਨੂੰ ਪਹੁੰਚ ਜਾਵੇ ਹਾਂਜੀ ਇਸ ਹਰ ਤਨ ਕਾ ਕੋਈ ਸ਼ਰੀਕ ਨਹੀਂ ਕਿਸੇ ਕਾ ਖਤ ਨਹੀਂ ਕਿਸੇ ਕੇ ਸੀਵ ਰੋਲ ਨਾ ਇਸਾਰਤਨ ਦਾ ਕੋਈ ਸ਼ਰੀਕ ਨਹੀਂ ਸ਼ਰੀਕ ਨਹੀਂ ਹੁੰਦਾ ਇਹਦਾ ਵੀ ਮੈਨੂੰ ਤੁਹਾਡੇ ਮੈਨੂੰ ਇਹਦਾ ਹਿੱਸਾ ਬੰਦਾ ਹੈ ਕਿਤੇ ਕੋਈ ਹਿੱਸਾ ਨਹੀਂ ਹੁੰਦਾ ਔਰ ਧੰਦੇ ਵਿੱਚ ਸ਼ਰੀਕ ਨਹੀਂ ਹਾਂਜੀ ਕਿਸੇ ਦਾ ਖਤ ਨਹੀਂ ਕਿਸੇ ਦਾ ਖਤ ਨਹੀਂ ਇਹ ਲੈਸ ਨਹੀਂ ਵੀ ਇਹ ਦੀ ਵਸੀਅਤ ਵੀ ਇਹਦੀ ਇੰਤਾਲ ਹੋ ਜੂ ਔਰ ਤੋਂ ਸਰਕਾਰ ਇਹ ਵੀ ਨਹੀਂ ਕਰ ਸਕਦੀ ਠੀਕ ਹੈ ਜੀ ਕਿਸੇ ਕੇ ਸੀਵ ਬੰਨਾ ਰੋਲ ਨਹੀਂ ਇਹ ਕਿਹੜਾ ਖੇਤ ਆ ਵੀ ਇਹਦਾ ਤੈਨੂੰ ਦਿੱਤਾ ਤਾਂ ਉਹਨੂੰ ਦਿੱਤਾ ਤੇ ਤੇ ਗਿਆਨ ਦੇ ਦਿੱਤਾ ਉਹਨੂੰ ਘੱਟ ਦੇ ਦਿੱਤਾ ਹਾਂਜੀ ਰੋਲ ਨਹੀਂ ਰੋਲ ਤੋਂ ਭਾਵ ਕੀ ਬਣਦਾ ਜੀ ਕਿਸੇ ਦਾ ਕੋਈ ਵਿੱਚ ਰੋਲ ਨਹੀਂ ਹੈ ਤੇ ਕਿਸੇ ਦਾ ਵਿੱਚ ਇਹਦੇ ਦਖਲ ਨਹੀਂ ਅੱਛਾ ਜੀ जे को ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚੌਕੂੰਡਾਂ ਵਿੱਚ ਕਾਲਾ ਕਰਵਾਇਆ ਜੇ ਕੋ ਵਕੀਲੀ ਕਰੇ ਨਾ ਮੈਂ ਹੋ ਕੇ ਉਹਨੂੰ ਦੇ ਦੂੰਗਾ ਉਹਦਾ ਮੂੰਹ ਚੌਕੂੰਡਾਂ ਦੀ ਕਾਲਾ ਕਰਾਇਆ ਪਰਮੇਸ਼ਰ ਨੇ ਉਹਦਾ ਇੰਨਾ ਕਾਲਾ ਹੋ ਜਾਂਦਾ ਦੂਏ ਨੂੰ ਕੀ ਦਊਗਾ ਆਪੇ ਜ਼ੁਲਮ ਕਰ ਬੈੰਦਾ ਮੂੰ ਕਾਲੇ ਤੋਂ ਪਾਵੇਗਾ ਜੀ ਅਜੰਤਾ ਵਧ ਗਈ ਉਹਦੇ ਅੰਦਰ ਵਿਰੋਧੀ ਹੋ ਗਿਆ ਨਾਮ ਦਾ ਹਾਂਜੀ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ ਦੇਹ ਦੇਹ ਨਿਤ ਨਿਤ ਸਵਾਇਆ ਕਿਸੇ ਦੀ ਵਕੀਲੀ ਕੀ ਜਲੂ ਦਿੱਤੀ ਚੀਜ਼ ਹੱਲ ਨੇ ਤੋਂ ਲੈ ਲੋ ਲੈ ਲੋ ਹਰ ਤੋਂ ਕੋਈ ਸਮਰੱਥ ਹੈ ਜਿੱਲੀ ਨਹੀਂ ਚੱਲਦੀ ਕਿਸੇ ਦੀ ਇਹ ਜਦਾਂ ਕਲੇਸ਼ ਨਹੀਂ ਚੱਲਦਾ ਹਾਂਜੀ ਦੇਹ ਦੇ ਨਿਤ ਨਿਚੜੇ ਸਵਾਇਆ ਉਹ ਦੇ ਹੀ ਜਾਂਦਾ ਨਿਤ ਤੇ ਸਵਾਇਆ ਹੋਈ ਜਾਂਦਾ ਉਹਦੇ ਕੋਲ ਤੁਸੀਂ ਕਿਵੇਂ ਰੋਕ ਰੋਕਿਆ ਜਾ ਸਕਦਾ ਗਿਆਨ ਨਹੀਂ ਰੋਕਿਆ ਜਾ ਸਕਦਾ ਕਿ ਸਦਾ ਗਿਆਨ ਉਹ ਕਮੋਂਦਾ ਹੈ ਉਹ ਸਭ ਵਿਚਾਰ ਕਰਦਾ ਗਿਆਨ ਨੂੰ ਮਿਲ ਜਾਂਦਾ ਤੁਸੀਂ ਕਿਵੇਂ ਰੋਕ ਦੋਗੇ ਕੋਈ ਇਲਾਜ ਨਹੀਂ ਇਹਦਾ ਹੈਗਾ ਬਾਹਰਲੇ ਲੋਕਾਂ ਕੋਲ ਠੀਕ ਹੈ ਜੀ ਇੱਥੇ ਨੌਵੀਂ ਪੌੜੀ ਸਮਾਪਤੀ ਹੈ ਜੀ